ਸੋ ਇੱਕ ਦਿਨ ਅ ਇਹ ਮੁੰਡਾ ਜਿਹੜਾ ਨੌਜਵਾਨ ਮੁੰਡਾ 26 ਸਾਲ ਦਾ 6 ਫੁੱਟ ਲੰਬਾ ਇਹ ਇਸ ਨੇ ਆਕੇ 뮤직 ਇੰਡਸਟਰੀ ਦੇ ਵਿੱਚ ਵਾਕਈ ਜਿਸ ਤਰ੍ਹਾਂ ਇਹਦੇ ਗੀਤ ਦੇ ਵਿੱਚ ਵੀ ਹੈ ਬਹੁਤ ਸਾਰੇ ਜਿਹੜੇ ਸਥਾਪਿਤ ਗਾਉਣ ਵਾਲੇ ਸਨ ਉਹਨਾਂ ਨੂੰ ਵੀ ਇਹਨਾਂ ਨੇ ਝੰਜੋੜ ਦਿੱਤਾ ਝੰਜੋੜ ਦਿੱਤਾ ਝੰਜੋੜ ਦਿੱਤਾ